ਕਈ ਕੋਟ ਭਏ ਅਭਿਮਾਨੀ ਹੁਣ ਚੱਲ ਪਏ ਦੂਏ ਕਈ ਕੋਟ ਭੁਲਾਵੀਂ ਫੰਕੀ ਚੱਲੀ ਹੈ ਪੋਜ਼ਿਟਿਵ ਵਾਲੇ ਪੋਜ਼ਿਟਿਵ ਵਾਲੇ ਲੈ ਕੇ ਚੱਲਦੇ ਲੋ ਉਧਰ ਕਰਦੇ ਪੀਰਤਵਾਸੀ ਕਰਤੇ ਬਣਵਾਸੀ ਬਣਵਾਸੀ ਕਰਦੇ ਜਾਂ ਬੇਦਕੇ ਸਰੂਪੇ ਕਰ ਲੈ ਫਿਰ ਅੰਤ ਤੇ ਇੱਥੇ ਟੱਪਾ ਹਾਂਈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਭਏ ਇਹ ਸਾਰ ਬਕਾਦਮੀ ਦੀ ਕਾਹ ਬੁਕਾਰਾਂ ਚ ਲੈ ਸਟਾਫਾ ਖਲੀ ਇਹ ਮਨੁੱਖਾਂ ਦੇ ਲੈਟਾ ਇਹ ਤਾਂ ਵਹੀ ਉਹ ਵੀ ਦੇ ਕਈ ਕੋਟਾਂ ਤੱਕ ਜਾਂਦੀ ਜਾਂ ਤੇ ਹੋਰ ਜਾਂਦੀ ਦੇ ਕਰੰਦਾ ਕਦੇ ਨਹੀਂ ਕਰ ਰਹੇ ਹੁਣ ਕਈ ਕੋਟ ਕਿਰਪਨ ਕਠੋਰ ਕਈ ਆਦਮ ਦੇ ਕਿਰਪਨ ਕਠੋਰ ਕਾਉਣ ਨੇ ਜਿਹੜੇ ਪੂਜਾ ਕਰਦੇ ਹੀ ਸੀ ਪੂਜਦੇ ਲੋਦੇ ਹੀ ਕੋਸ ਤਾ ਵੀ ਨਹੀਂ ਇਰਫਨ ਕਰ ਹੋਰ ਕਈ ਕੋਟੋ ਤੇ ਇੱਕ ਆਤਮਿਕ ਗੌਰ ਕਈ ਕੋਰੇ ਆਤਮਾ ਤੋਂ ਆਤਮਿਕਾਂ ਤੋਂ ਕੋਰੇ ਨੇ ਆਤਮਿਕਾਂ ਦੀ ਗੱਲ ਮਦਦ ਨਹੀਂ ਸੋਦੇ ਨਹੀਂ ਕੀਤੀ ਜੀ ਚੱਪੇ ਕੋਈ ਸਾਡੀ ਉਹ ਕਹਿੰਦਾ ਇਹ ਚੀਜ਼ ਕਰਨਾ ਨਾ ਆ ਗਿਆ ਤੁਹਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਇੱਥੇ ਉਹ ਦੁਨੀਆਂ ਪਿਆਰ ਨੂੰ ਸੋਤ ਦੁਨੀਆਂ ਆਜਲੀਆ ਵਿਚਾਤਕ ਵੀਰੇ ਵਿਚਾ ਬਹਾਂਸ ਬੋਲ ਉਹ ਮਹਿੰਦੋ ਕੋਟ ਜਨਾਬ ਉਹ ਵੀ ਹੈਂਡਲਡ ਆ ਬੁੱਕ ਪਰ ਉਹ ਤੁਸਾਂ ਕੋ ਉਹ ਪਰ ਪੋਜ਼ਿਟਿਵ ਤੇ ਨਹੀਂ ਆਇਆ ਉਹ ਖੋਜੀਓ ਨੇ ਉਹ ਜਿਹੜੇ ਰੂਪ ਪਰ ਦਰਦ ਧਰਮਕ ਬਦ ਇਹ ਤਾਂ ਤਾਂ ਨਹੀਂ ਪਰ ਉਹ ਲਗੇ ਚਲੋਰਾ ਅਲੱਗ ਗੱਲ ਇਹ ਠਾਕਨ ਠਾਕਾ ਬੜੀ ਪਰ ਦਰਮੋਖ ਹੋ ਗਏ ਪਰ ਦਰਮੋਖ ਹੋ ਗਏ ਉਹ ਰਾਜਿਆਂ ਚ ਵੀ ਆ ਗਏ ਜਿਹੜੇ ਰਾਜੇ ਨੇ ਉਪੀਰਦਨ ਨਾ ਕਰਦੇ ਸੰਤ ਬਿਹਰਦ ਦੋਈ ਮਾ ਮ ਕਰਦੇ ਨਾ ਕਰਪੂ ਦੋਈ ਦੀ ਉਹ ਸੇਈ ਕੋਟ ਪਰ ਦੂਫਰਾ ਕਰੇ ਅਦੂਰਨ ਦੁੱਖਦੰ ਦੂਸਰਨ ਦੁੱਖਦੰ ਕੰਮ ਕਰਦੇ ਪਰ ਦੂਗਰ ਦੂਗਰ ਉਹ ਬੇਸਪਾ ਦੂਰੇ ਤਰੀਕ ਕੋਈ ਨ ਦੁੱਖ ਤੈਨ ਦੇ ਵਿੱਚ ਹੀ ਉਹ ਉਹਨਾਂ ਨੂੰ ਕੁਝ ਨਹੀਂ ਮਾਣ ਆਉਂਦਾ ਨੇ ਜਿੰਨ ਲੋਕਾਂ ਨੂੰ ਦੁੱਖ ਦੇ ਲੁਟਾਉਣਾ ਤੇ ਦੋਵਾਂ ਦਾ ਪਹਿਲੇ ਵੀ ਲੋਕ ਚਾਹੀਏ ਲੋਕ ਹਰ ਪ੍ਰਕਾਰ ਦੇ ਲੋਕ ਚਾਹੀਦੇ ਉੱਤੇ ਮੇਜ ਦੁੱਖ ਦੇ ਨੂ ਬਤਾਉਂਦੇ ਉਹ ਦੂਖ ਨੂੰ ਬਣਾ ਲਾਇਆ ਕਿ ਜੀ ਮਨਾ ਕਥਾ ਲਾ ਬਜਾਈਏ ਦੂਖਾ ਦੁਪਹਾੜਾ ਨਾ ਲੱਗੇ ਠੀਕ ਸਹੀ ਕੋਟ ਪਰ ਦੂਖ ਨਾ ਕਰੇ ਕਹਿੰਦੇ ਦੂਖ ਨਾ ਅੱਛਾ ਲੱਗਦਾ ਹੈ ਦੂਖ ਨਾ ਬਹੁਤ ਬੜਨਾ ਕਰਕੇ ਨਹੀਂ ਨਹੀਂ ਕੰਨਾਂ ਹੋਵੇ ਤਾਂ ਕੰਨ ਆਉਂ ਜਾਂਦਾ ਹੈ ਹੈ ਤਾਊਗਾ ਕੰਨ ਨਹੀਂ ਆਉਂਦਾ ਨਾ ਕਰੇ ਨੰਨੇ ਨਾ ਹੁੰਦਾ ਹੀ ਨੰਕਣਾ ਲੱਗਦਾ ਹਾਂ ਨਾ ਤੇ ਆ ਜੂਗਾ ਫੇ ਤਾਂ ਜਿੱਤੇ ਦੂਘਾ ਲਫਜ਼ਾਂ ਨਾਲ ਦਏ ਸੀ ਕਿ ਅੱਲਾ ਲਿਖਣ ਛੈਦੀ ਉਹ ਬਹੁਤ ਹਾਂ ਤਿੰਨ ਲਫਜ਼ ਵਾਸਤੇ ਦੁਬਾਰ ਤੇ ਹੀ ਵਾਸਤੇ ਲਿਖਣ ਛੈਲੀ ਕੇ ਦਾ ਰੱਖਿਆ ਤਾਂ ਲਿਖ ਕੇ ਤੋਂ ਘਟ ਪੈਣ ਕਈ ਕੋਟ ਮਾਇਆ ਸ਼ਰਮਾ ਮੈਂ ਕੋਈ ਕੋਟ ਮਾਇਆ ਸ਼ਰਮਾ ਹੈ ਕੋਈ ਕਰੋੜ ਮਾਇਆ ਪਾਸਾ ਹੈ ਆਪਣੀ ਦੂਤ ਘਰ ਮੈਂ ਜਾ ਰਹੀ ਸਾਨੂੰ ਇਹ ਤਾਂ ਬਹੁਤ ਦੂਰੀ ਦੇ ਵਿੱਚੋਂ ਆਇਆ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਹਰ ਕੋਰਟੋਂ ਆਉਂਦਾ ਹੈ ਨਾ ਕੋਰਟੋਂ ਜਾ ਰਿਹਾ ਕੋਰਟ ਦੀ ਗੱਲ ਕਰੀਏ ਤਾਂ ਜੇ ਟੈਗਿੰਗ ਸਿਹਾਰੀ ਲੱਗੀ ਹੋਵੇ ਤਾਂ ਕੋਈ ਕਈ ਕੋਟ ਮਾਇਆ ਧਰਮ ਆਹੇ ਕਈ ਕੋਟ ਪ੍ਰਦੇਸ਼ ਸਹੀ ਉਹ ਜਿਹੜੇ ਕੋਠੀ ਕੋਠੀ ਬਣਾ ਹਾਂ ਹਾਂ ਸਹੀ ਉਹ ਕੋਠੀ ਹੈ ਕੋਠੀ ਉਹ ਕਈ ਕੋਟ ਪ੍ਰਦੇਸ਼ ਭਰਮਾਏ ਕਈ ਕੋਟ ਕਈ ਪ੍ਰੋਗਰਾਮ ਪ੍ਰਦੇਸ਼ਾਂ ਦੇ ਵਿਚਾਰੇ ਫਿਰਦੇ ਨੇ ਮਾਇਆ ਵਾਸਤੇ ਪ੍ਰਦੇਸ਼ ਤੋਂ ਮੈਂ ਜਿੱਤੇ ਜਿੱਤੇ ਲਾਭ ਉਹ ਚਿੱਤੇ ਲੱਗਿਰਾਂ ਨਾਨਕ ਕਰਤੇ ਕੀ ਜਾਣੇ ਕਰਤਾ ਰਚਿ ਜੇ ਕਿ ਲਾਭੋ ਜਿਥੇ ਜਿਥੇ ਤਾ ਲਾਇ ਹੋਏ ਡਿਊਟੀਆਂ ਤੇ ਤੇ ਤੇ ਲੱਗਣਾ ਤੇ ਤੇ ਲੱਗਣਾ ਪੈਣਾ ਉਥੇ ਉਥੇ ਲੱਗੇ ਨਾਨਕ ਕਰਤੇ ਕੀ ਜਾਣੇ ਕਰਤਾ ਰਚ ਨਾ ਨੇ ਕਿਉਂ ਲਗੇ ਇਹ ਕਰਤੇ ਵੀ ਰਚਣਾ ਉਹਨੇ ਲਾਇ ਹੋਏ ਨੇ ਜੋ ਲਾਇਏ ਨੇ ਜੋ ਨਹੀਂ ਲਾਇਏ ਉਹ ਹੀ ਕਰਤਾ ਨਾਨਕ ਕਰਤੇ ਕੀ ਜਾਣੇ ਕਰਤਾ ਉਧਰੇ ਜਨੋ ਆਉਂਦੇ ਨੇ ਜਿਹੜੇ ਦਿੱਤੇ ਲਾਇਏ ਨੇ ਬਾਹਰ ਕਿਉਂ ਭੇਜੇ ਨੇ ਰੋਹ ਆਦਮੀ ਇਹ ਤਾਂ ਉਹ ਜਾਣਦਾ ਕਿ ਕੋਈ ਪ੍ਰੋਗਰਾਮ ਹੋਦਾ ਹੋਊਗਾ ਅਗਲਾ ਫਦਰ ਕੀ ਪ੍ਰੋਗਰਾਮ ਆਉਦਾ ਹੋਣਾ ਆਪਣੇ ਸਾਹਿਬ ਨਾਲ ਆਇਆ ਉਧਰੇ ਪਹਿਲਾਂ ਬਾਹਰ ਭੇਜੇ ਸੀ ਲੋਕ ਗਏ ਸੀ ਯਾ ਜਾਣਦੇ ਨੇ ਉਹ ਉਹ ਲੋਕ ਕੋਤਾਰੇ ਬਣਾ ਲੈ ਜਾ ਕੇ ਹੁਨਾ ਯਾਦੋਂ ਨਬੀਆ ਅੱਖਾਂ ਖੋਜਦੇ ਸੀ ਲੋਕ ਫੋਰ ਬੀਜ ਨੇ ਸੰਸਤਨ ਇਹ ਵੀ ਅੰਦਰ ਲੱਗੇ ਹਨ ਜਾਣਦੇ ਲੋਕ ਹਿੰਦੂ ਵੀ ਨੇ ਜਾਣਦਾ ਕੋਈ ਸਾਰੇ ਕਰਦੇ ਹੀ ਉਹ ਆਖਾ ਪੈਦਾਂ ਨੂੰ ਵੀ ਕਰਦੇ ਨੇ ਵਰਤੈ ਹੀ ਹੈ ਕੋਈ ਹੈ ਜਿਹਨਾਂ ਲੋੜ ਸੀ ਅੱਗੇ ਉਹਨਾਂ ਨੇ ਹੋਰ ਵੀ ਸੁਨੇਹਾ ਸੁਣੀ ਵੀ ਸੁਣਿਆ ਫੋਰ ਵੀ ਸੁਣੇ ਨੇ ਮਸਜਿਦ ਉਹਦਾ ਰਹਿ ਆਦਮ ਨੇ ਇੱਕ ਗਿਆਨ ਬਾਹਰ ਤੇ ਬਾਹਰ ਦੀ ਇੱਛਾ ਪਹਿਲਾਂ ਹੁੰਦੀ ਹੈ ਜਦੋਂ ਗਿਆਨ ਦੇ ਤੌਰ ਤੇ ਲੱਗਦਾ ਫਿਰ ਲੱਗਦੀ ਵੀ ਕੋਈ ਬਾਣੀ ਗੁਰਬਾਣੀ ਕੀ ਕਹਿੰਦੀ ਹੈ ਵਿੱਚ ਕੋਈ ਹਾਂ ਕੋਈ ਸਾਨੂੰ ਲਬਦਾ ਦੀ ਕੀ ਹੈ ਕੋਈ ਇੱਛਾ ਜੀ ਲੋਕਾਂ ਦੇ ਉਹਦੇ ਸਾਬ ਨਾਲ ਜਾ ਤਾਇਨ ਤੋਂ ਬਾਹਰ ਹੋਜੋ ਤੋਂ ਜਿੱਦ ਬਾਹਰ ਬੈਠੇ ਦੀ ਆਸੀ ਸ਼ਾਇਦ ਪਰਮੇਸ਼ਰ ਨੇ ਪਹਿਲਾਂ ਹੀ ਕੋਈ ਪ੍ਰਾਂਤਿਕ ਜਿੱਕਰ ਕਰਕੇ ਹੀ ਜਾਣੇ ਕਰਤਾ ਸਾਰੇ ਕੁਝ ਜੋ ਬਾਹਰ ਦੇ ਦੇਸ਼ ਨੇ ਸਾਰੀ ਬੜੀ ਬਲੋਸਟੀ ਦੀਦੀ ਰੋੜਾ ਇਕਦਮ ਫਿਰ ਉਹ ਉੱਥੇ ਦੀ ਬੋਲੀ ਵੀ ਚੰਗ ਤੇ ਨਾਲ ਜਿਹੜੇ ਵੀ ਹੁੰਦੇ ਨੇ ਸਾਰੀ ਪਹਿਲਾਂ ਹੀ ਤਿਆਰੀ ਕਰਦੇ ਨੇ ਜੀ ਹਾਂ ਇਹ ਤੋਂ ਥੋੜਾ ਜਿਹਾ ਚੱਕਰ ਮੰਨਦੇ ਜਿੱਤੇ ਜਿੱਤੇ ਤੇ ਲੱਗੇ ਕਰਤੇ ਨੇ ਲਾਏ ਤੇ ਮਨ ਦਾ ਰਜਾ ਜੀਵ ਦਾ ਚ ਕੀ ਉਹਦਾ ਵੀ ਇੱਛਾ ਸਾਇਦ ਉਹ ਨਹੀਂ ਕਿਦੇ ਕਿ ਉਹ ਲਾਇਤਾਨ ਹੈ ਨਾ ਉਹ ਪ੍ਰਦੇਸ਼ ਤੋਂ ਆਇਆ ਕੋਣ ਹੈ ਉੱਥੇ ਕੀ ਕਰਦਾ ਇਹ ਗੱਲ ਅਲੱਗ ਹੈ ਪ੍ਰਦੇਸ਼ ਵਰ ਮਾ ਉਹ ਪ੍ਰਦੇਸ਼ ਚਲੋ ਇਹ ਥੀ ਉਹ ਗੱਲ ਹੈ ਕਿ ਕੋੜ ਪ੍ਰਦੇਸ਼ ਪਰ ਮਾ ਹੈ ਉਹ ਤਾਂ ਬਈ ਜਾ ਉੱਥੇ ਪ੍ਰਦੇਸ਼ੇ ਪਰ ਜਿੱਦ ਉੱਥੇ ਕੀ ਕਰਦਾ ਉਹ ਗੱਲ ਅਲੱਗ ਹੈ ਉਹ ਵਿਖਸੂ ਕਹਣਾ ਕੁਝ ਉਹਦਾ ਕੁਝ ਇਹਦਾ ਜਿਹੜਾ ਜੂਵੇਂ ਸਾ ਉਹਦਾ ਉੱਥੇ ਵੀ ਜੇ ਮੰਨ ਜੂਗਾ ਜਾਇਆਊਗਾ ਜੇ ਪਰ ਉਹਨਾਂ ਚਾਹਤਾ ਉੱਥੇ ਵੀ ਇਹੀ ਰਹੇ ਇੱਥੇ ਵੀ ਰਹੇ ਚਾਹਤ ਕੋਈ ਗੱਲ ਨਹੀਂ ਆ ਕਿਉਂ ਜੇ ਬਾਹਰ ਚੁੱਕ ਗਏ ਇੱਥੇ ਵੀ ਮਜ਼ਦੂਰੀ ਕਰ ਬਾਹਰ ਕੋਈ ਨਾ ਸਪੈਸ਼ਲ ਪ੍ਰੋਗਰਾਮ ਹੈ ਬਾਹਰ ਵੀ ਕੋਈ ਹੋਰ ਵੀ ਕੁਝ ਕਰਨਾ ਆਣਾ ਹੈ ਸਰ ਰੋਟੀ ਕਾਢਣੀ ਹੈ ਉਹ ਜਿਹੜਾ ਉਹਦਾ ਪ੍ਰੋਗਰਾਮ ਹੈ ਨਾ ਉਹ ਕੁਝ ਉੱਥੇ ਵੀ ਹੋਰ ਹੈ ਰੋਕੀਦਾ ਤੇ ਵੀ ਕਾਗਜ਼ੀ ਇੱਕ ਦਮ ਸਾਰੀ ਵਰਡ ਦੇ ਵਿੱਚ ਗੁਰਮਤਿ ਭਲਾਈ ਜਾ ਸਕਦੀ ਦੀ ਜੇ ਦਾ ਨਾ ਹੁੰਦਾ ਇਹ ਉਹਦਾ ਪ੍ਰੋਗਰਾਮ ਹਾਂ ਜੇ ਜੇ ਰਾਏ ਕਰਤੋ ਤੇ ਜੇ ਆਇਆ ਮਾਧਿਅਮ ਨੇ ਜੀਵਨ ਮਾਧਮ ਹੋਣਾ ਹੈ ਮੈਂ ਤਾਂ ਸਿਰ ਉਹੀ ਗੱਲ ਉਸ ਗੱਲ ਨੂੰ ਮਾਧਿਮ ਲਾਇ ਤੇ ਤੇ ਲੱਗਣਾ ਇਹ ਲੱਗਦਾ ਜਿਉਂ ਹੀ ਲੋੜ ਲੱਗਣਾ ਇਹ ਰੋੜਾ ਸਾਡੀ ਜਿਹੜੀ ਇੱਛਾ ਸੀ ਉੱਥੇ ਹੀ ਲੱਗਿਆ ਇੱਛਾ ਉੱਥੋਂ ਹੀ ਆਈ ਸੀ ਕਾਦੇ ਮਿੰਟ ਦੀ ਨੌਕਰੀ ਦਿੱਤੀ ਹੈ ਕੋਈ ਆਦਮੀ ਜਾਂਦਾ ਕਿ ਤੇ ਨੌਕਰੀ ਤੋਂ ਨੌਕਰੀ ਮਿਲਦੀ ਨਹੀਂ ਇਹ ਲਾਉਣੇ ਵਾਲਾ ਹੀ ਜਾਂਦਾ ਇਹਦਾ ਚਾਹੁੰਦਾ ਸੀ ਲੱਗਣਾ ਉਹਦੀ ਜਾਂਦਾ ਉਨੇ ਲਾਇਆ ਜੀ ਉਹਨੇ ਜਾਇਆ ਬੰਦੀ ਨਾ ਜਨਾਵ ਰਹਿ ਰਿਹਾ ਤੇ ਉਹਨੂੰ ਜਿੱਦਵਾਂ ਰੋਣਾ ਤੇ ਲੱਗੂਗਾ ਜਿਹੜੂ ਦਾ ਹੋਗਾ ਦਾ ਇਹ ਕਿਤੇ ਗੱਲ ਦਾ ਇਹਦਾ ਵੀ ਹੋ ਜਾਂਦਾ ਆਪਣੀ ਇੱਛਾ ਕਰਨੀ ਇਹਦਾ ਬਹੂਰਾ ਹੋਰ ਕੋਈ ਗੱਲ ਹੈ ਨਾ ਹੋਈ ਪੂਰੀ ਤਾਂ ਨਹੀਂ ਉਹ